शलोक मोहल्ला पहला सावन रात आहाड़ दे काम करो दोय खेत लभ वतर द रोग हाली राख खेत जड़ा सावन नो यों कणणाव हां जी कि तैयारी नाल भी आया सावनी सर, सरसी सरस्वती कामली उते आने नु तैयारी है उते इसी ते सावन पुल्लिंग आया सावन ਸਾਲ ਅੱਗੇ ਵਾਣਨ ਲੱਗ। ਉਹਦਾ ਹੀ ਰੂਪ ਹੋ ਜਾ, ਉਹ ਹੀ ਬਣ ਜਾ ਜਿਹੜਾ ਉਹ ਐ। ਹੋ ਜਾ ਤੂੰ ਬਣ ਜਾ ਜਿਹੜਾ ਚਿੱਤੈ ਮਨ ਨੂੰ ਤੂੰ ਬਣ ਜਾ। ਰਾਤੀ ਰੰਗ ਚੜਿਆ ਹੋਇਆ। ਸਮਝ ਲਓ। ਦੇ ਦਿਨ ਵਰਗਾ ਤਾਂ ਚੜੂਗਾ ਸਾੜ। ਤਾਂ ਵੀ ਇਹਨਾਂ ਹੁੰਦੇ ਬਹੁਤ ਉੱਪਰ ਆ ਜਾਂਦਾ। ਸੂਰਜ ਉੱਪਰ ਹੁੰਦਾ। ਛੇਤੀਓ ਚੰਨ ਜ਼ਿਆਦਾ ਤੇਜ਼ ਹੁੰਦਾ। ਸ਼ੇਖਰ ਹੋਵੇ ਸੂਰਜ, ਛਿਆਲ ਦੇ ਮਹੀਨੇ ਚੰਨ ਘਟਦਾ ਦਿੰਦਾ ਹੁੰਦਾ ਸੂਰਜ। ਚੱਟੀਆਂ ਕਰਨਾ ਹੁੰਦੀਆਂ ਨੇ। ਕਰਮੀ ਵੀ ਪੂਰੀ ਤੇਜ ਵੀ ਪੂਰਾ ਹੁੰਦਾ ਚਾਣਨ ਵੀ ਪੂਰਾ ਹੁੰਦਾ ਜਾਨ ਪ੍ਰਚੰਡ ਹੁੰਦਾ ਪ੍ਰਚੰਡ ਜਾਨ ਦੀ ਅਵਸਥਾ ਹੋ ਜੂਗੀ ਤੇ ਚਾਣਨ ਬਾਹਰ ਹਾਂਜੀ ਕਾਮ ਕਰੋਧ ਦੋਏ ਖੇਤ ਕਾਮ ਨਾਲ ਕਰੋਧ ਦੋਏ ਖੇਤ ਨੇ ਖੇਤਾਂ ਦੇ ਉੱਤੇ ਹੀ ਪੈਣੇ ਆ ਧੁੱਪ ਹਾਰ ਦੀ ਧੁੱਪ ਪੈਂਦੀ ਹੈ ਸਭ ਸੁੱਕ ਜਾਂਦਾ ਹੁਣ ਬਾਤ ਆਉਂਦਾ ਜਮੀਨ ਤਬਾਹੇ ਰੱਖ ਦਿੰਦਾ ਕਾਮ ਕ્રોਧ ਦੇ ਖੇਤਾਂ ਨੂੰ ਤਪਾ ਕੇ ਰੱਖਣਾ ਦਾ ਜੋ ਕਾਬੂ ਹੈ ਸਭ ਸਾਲ ਦਰ ਵਿੱਚ ਜਾਨ ਪਰ ਚੰਡਜਲ ਹੁੰਦਾ ਹੈ ਇਹ ਕਹਿਣਾ ਚਾਹੁੰਦੇ ਆਂ ਦੀ ਮਨ ਚ ਤਿੱਖ ਹੋ ਪੈਦਾ ਕੀ ਹੋਣਾ ਪੈਦਾ ਹੋ ਸਕਦਾ ਕੁਝ ਬਕਾਲ ਹੀ ਨਹੀਂ ਪੈਦਾ ਹੋ ਸਕਦੇ ਕ੍ਰੋਧ ਫੋਕਾਰ ਪੈਦਾ ਹੋਣਾ ਨਹੀਂ ਕਾਮਨਾਵਾਂ ਇੱਛਾਵਾਂ ਪੈਦਾ ਹੋਣੀਆਂ ਤੇ ਪੈਦਾ ਹੀ ਨਹੀਂ ਹੋ ਸਕਦਾ ਕੁਝ ਜਵੀਰ ਤਾਂ ਸੁੱਕੀ ਹੈ ਜੋ ਜੋਪੂਰ ਰਣਪਟਿਆਰੇ ਉਹ ਗੱਲ ਤਾਂ ਹੋਈ ਹੋਈ ਹੈ ਉਹ ਆਮ ਜਿਹੜੇ ਆਮ ਅਰਥ ਹੈ ਉਹ ਕਹਿੰਦੇ ਆਂ ਵੀ ਇਹ ਦੋਹੇ ਖੇਤ ਦੇ ਵਿੱਚ ਜਮਾਏ ਹੋਏ ਆਂ ਕਾਮ ਤੇ ਕ੍ਰੋਧ ਉਹਨਾਂ ਨੇ ਜਮਾਏ ਹੋਏ ਨੇ ਨਾ ਫਿਰ ਹਾਂਜੀ ਲਭ ਵਤਰ ਦਰੋਗ ਬਿਓ ਹਾਲੀ ਰਾਹਕ ਹੇਤ ਜਿਹੜਾ ਲਭ ਹੈ ਉਹ ਇੰਨਾ ਕਿ ਜਨਾਗ ਖੇਤ ਦੇ ਵਿੱਚ ਇਨਾ ਗਲੋਪ ਚਾਹੀਦਾ ਜ਼ਰਾ ਆਪਣੇ ਆਪ ਨਾਲ ਦੇਉ ਤੋਂ ਲੈਵੋ ਮੰਗੇ ਨਾ ਦੋਇ ਚੂਨਾ ਪਾਓ ਕੇ ਸੰਗਲੂਨਾ ਸਿਰ ਮੰਗੂ ਥਾਲੇ ਮੋ ਕੋ ਇਹ ਇਨਾ ਕੇ ਕਹਿੰਦੇ ਸਰੀਰ ਵਾਸਤੇ ਆਪਣੇ ਵਾਸਤੇ ਨਹੀਂ ਹੈ ਸਰੀਰ ਨੂੰ ਇਨਾ ਚਾਹੀਦਾ ਚਾਹੀਦਾ ਇਨਾ ਤੋਂ ਤੁਸੀਂ ਲੱਭ ਕਰ ਸਕਦੇ ਹੋ ਜਿੰਨਾ ਖੇਤ ਦੇ ਵਿੱਚ ਬੁੱਤਰ ਹੁੰਦਾ ਉਹ ਵੀ ਨਹੀਂ ਲਵੀ ਜ਼ਮੀਨ ਜੁੱਦੀ ਹੈ ਜਰਾ ਬੀਜ ਹੈ ਵਿਚ ਬੀਜਣਾ ਉਹ ਰੋਗ ਦਾ ਰੋਗ ਦਾ ਨਹੀਂ ਬਹੁਤ ਵੀ ਜਿਹੜੇ ਨੇ ਉੱਪਰ ਨਹੀਂ ਬੀਜਣੇ ਨਾਮ ਰਾਸ ਨਾਲ ਕੇ ਆ ਤੁਸੀਂ ਨੂੰ ਸਿੰਜੋਗੇ ਵੀ ਨਾਮ ਵੀ ਬੱਤਰ ਹੋ ਜਾਊਗਾ ਰੋਗ ਨਹੀਂ ਬੀਜਣਾ ਦਰੋਗ ਵੀ ਉਹ ਹੰਕਾਰ ਨਹੀਂ ਬੀਜਣਾ ਬਿਬਰਤਾ ਵੀ ਰੋਗ ਰਹਿਤ ਵੀ ਹੋਵੇ ਹੰਕਾਰ ਤੋਂ ਰਹਿਤ ਵੀ ਹੋਵੇ ਜੋ ਬੀਜਣਾ ਹੰਕਾਰ ਨਾ ਹੋਵੇ ਉਹ ਵੀ ਨਾ ਹੋਵੇ ਬੀਜੋ ਜੋ ਮਰਜੀ ਸੇਵਾ ਬੀਜੋ ਤਾਮੀਰ ਰੋਗ ਰਹੇ ਤੋਂ ਅਹੰਕਾਰ ਤੋਂ ਰਹਤ ਹੋਵੇ ਮੈਦਾਨ ਹੈ ਰੋਗ ਰਹੇ ਤੋਂ ਜੰਗਾਲ ਨਹੀਂ ਹੋਣਾ ਚਾਹੀਦਾ ਹਾਂਜੀ ਹਾਲੀ ਰਾਹਕ ਹੀਤ ਰਾਹਕ ਆਹੀ ਰਸਤੇ ਚੱਲਣ ਵਾਲਾ ਹੋਵੇ ਸੱਚੇ ਮਾਰਗ ਤੇ ਰਾਹਕ ਹੋਵੇ ਰਾਹ ਚੱਲਣ ਵਾਲਾ ਰਸਤੇ ਦਾ ਧਾਰਨੀ ਔਰ ਹ ਰਸਤੇ ਨਾ ਪ੍ਰੇਮ ਵੀ ਹੋਵੇ ਚੱਲਣ ਦਾ </thead> ਰਾਗ ਉਹ ਜਾਣਾ ਦੇਖਦਾਨ ਕਰਨ ਕਰ ਲੈਣ ਦੇ ਬਰਾਬਰ ਹੈ ਠੀਕ ਹੈ ਇਹ ਤਾਂ ਹੋਰ ਜੇ ਇਹੇ ਤਾਂ ਉਹਦਾ ਰੋਲ ਮਾਡਲ ਬਣੂਗਾ ਕਮਿਲਾ ਮੈਂ ਰੋਲ ਮਾਡਲ ਜ਼ਰੂਰ ਬਣੂਗਾ ਜੇ ਬਹੁਤਾ ਗਿਆਨ ਰੋਲ ਮਾਡਲ ਜੂਰ ਸਿੱਖੀ ਦਾ ਬਣੂਗਾ ਰਾਗ ਵੀ ਹਿਤਕਾਰੀ ਹੋਵੇ ਪੰਥ ਦਾ ਹੇਤਾਲਾ ਹੋਵੇ ਪੰਥ ਦਾ ਨੁਕਸਾਨ ਨਾ ਕਰੇ ਸਿੱਖੀ ਨੂੰ ਬਦਨਾਮ ਕਰਨ ਵਾਲਾ ਨਾ ਹੋਵੇ ਇਹਦੇ ਨਾਲ ਸਿੱਖੀ ਦੀ ਇੱਜ਼ਤ ਬਤੇ ਐਸਾ ਸਿਖ ਚਾਹੀਦਾ ਹਾਂਜੀ ਅਛਾ ਇਹ ਦਰੋਗ ਅੱਖਰ ਕਿੱਜੇਗਾ ਪਹਿਲਾਂ ਵੀ ਹੁੰਦਾ ਉੱਥੇ ਦਰੋਗ ਪੜਨ ਦੇ ਨਾਲ ਹੈ ਜੀ ਦਰੋਗ ਪੜ ਪੜ ਖੁਸ਼ੀ ਹੋਈ ਤੇ ਕਬੀਰ ਜੀ ਦਾ ਉਰੇਜ ਦਰੋਗ ਠੀਕ ਆ ਫਿਰ ਖੁਸ਼ੀ ਤਾਂ ਹੀ ਹੋਊਗੀ ਦਰੋਗ ਚੀਜ਼ ਪੜੂਗਾ ਜਿਹ ਤੋਂ ਹੰਕਾਰ ਨਾ ਪੈਦਾ ਹੋਵੇ ਵਿੱਦਿਆ ਤੋਂ ਹੰਕਾਰ ਪੈਦਾ ਹੁੰਦਾ ਖੁਸ਼ੀ ਨਹੀਂ ਹੁੰਦੀ ਦਸਾਰ ਹੁੰਦਾ ਵਿੱਦਿਆ ਨਾਲ ਪੜੂ ਬਾਦ ਨਾ ਜਾਣੂ ਵਿੱਦਿਆ ਤੋਂ ਬਾਦਵਾਦ ਪੈਦਾ ਹੁੰਦਾ ਪੜੇ ਤੇ ਜਿਹੜੀ ਦਰੋਗ ਹੈ ਉਹ ਤੋਂ ਬਾਦਵਾਦ ਨਹੀਂ ਪੈਦਾ ਹੁੰਦਾ ਰੋਗ ਨਹੀਂ ਪੈਦਾ ਹੁੰਦਾ ਜਿਹੜੀ ਪੜ੍ਹਾਈ ਤੋਂ ਹੰਕਾਰ ਪੈਦਾ ਹੋ ਉਹ ਉੱਥੇ ਬਾਦ-ਵਿਵਾਦ ਵੀ ਪੈਦਾ ਹੋਊਗਾ। ਅੱਛਾ, ਦਰੋਗ ਦਾ ਦਰੋਗ ਨੂੰ ਝੂਠ ਲਿਖਦੇ ਆਂ ਇਹਨਾਂ ਦਾ ਫਿਰ ਅਰਥ ਬਿਲਕੁਲ ਉਲਟੇ ਹੋ ਜਾਣਗੇ। ਉਹ ਤੁਸੀਂ ਦੇਖ ਲਓ ਤੋਲ ਕੇ ਤਕੜੀ ਪਾ ਕੇ ਜੇ ਨਾਲ ਅਰਥ ਬੰਦ ਰਹੇ ਵਧੀਏ ਉਹ ਕਹਿੰਦੇ ਦਰੋਗ ਦਾ ਭਾਵ ਹੈਗਾ ਝੂਠ ਦਰੋਗ ਪੜ ਪੜ ਇਹ ਪੜ ਕੇ ਕਿ ਵੇਦ ਝੂਠੇ ਹਨ ਜਾਂ ਇਹ ਪੜ ਕੇ ਕਿ ਕਿਤੇਵ ਝੂਠੇ ਹਨ। ਯਮਨੋ ਵਾਲਾ ਸ਼ਾਬਦ ਹੈਗਾ ਇਹ ਜੋ ਦੁਨੀਆ ਸਹਿਰ ਮੇਲਾ ਦਸਤਗੀਰੀ ਨਾਹੀਂ ਦਰੋਗ ਪੜ ਉਹ ਕਹਤਾ ਨੇ ਰੋਗ ਬਣਦੇ ਨੇ ਜ਼ਬਰ ਤੇ ਸ਼ਾਸਰ ਪੜਦੇ ਨੇ ਇੱਕ ਪਾਸੇ ਜਿਹੜੇ ਵੇਟ ਪੜਦੇ ਨੇ ਦਰੋਗ ਪੜਦੇ ਨੇ ਗੁਰਬਾਣੀ ਪੜਦੇ ਨੇ ਉਹ ਰੋਗ ਦੇ ਅੰਦਰ ਪੈਦਾ ਨਹੀਂ ਹੁੰਦਾ ਉਹ ਆਪ ਦੀ ਕੀ ਹੁੰਦਾ ਉਹਨਾਂ ਦਾ ਗੁਰਵੰਤਕ ਕਦੇ ਵੀ ਚਾਰ ਇਕੱਠੇ ਨਹੀਂ بیٹھ ਸਕਦੇ ਇੱਕ ਦੂਜੇ ਨਾਲ ਕਰੋੜ ਵੀ ਹੋਣ ਠੀਕ ਹੈ ਜੀ ਇੱਕ ਜਗ੍ਹਾ RAM ਕਲੀਵਾਰ ਵਿੱਚ ਬੀਜ ਬਖਸ਼ੀਸ਼ ਬੋਹਲ ਦੁਨੀਆ ਸਗਲ ਦਰੋਗ ਨਾਨਕ ਨਦਰੀ ਕਰਮ ਹੋਏ ਜਾਵੇਂ ਸਗਲ ਵਿਜੋਗ ਕਿਤੇ ਵੀ ਠੀਕ ਹੈ ਸਾਰੇ ਲੋਕ ਰਹਿਤ ਕਰ ਦੂਜੇ ਆ ਕੋਈ ਸ਼ੁਭ ਬਣ ਨੂੰ ਤੇ ਨਾਮ ਦਾ ਬੋਲ ਲੱਗ ਜਾ ਬੀਜ ਬਖਸ਼ੀਸ਼ ਬੋਹਲ ਓਹ ਬਸ ਜਿਉਣਾ ਬੋਲ ਲੱਗ ਜਾ ਠੇਰ ਲੱਗ ਜਾ ਲਗਾਤਾਰ ਮੀਂਹ ਹੀ ਜਾਵੇ ਨਾਪ ਜੇ ਛੜੀ ਲੱਗ ਜਾ ਬਰਸ ਤੇ ਹਟੇ ਹੀ ਨਾ ਇਹ ਬਾਅਦ ਚ 4-500 ਸਾਲ ਹੋਈ ਜਾਵੇ ਗੁਰਮਤਿ ਦੀ ਤਾਂ ਇੱਥੇ ਰੋਗ ਰਤ ਕਹ ਕੌਣ ਜਾਊ ਫੜੀ ਤਾਂ 1000 ਸਾਲ ਸਿੱਖੀ ਦਾ ਪਚਾ ਜੋਰਾਂ ਝੋਰਾ ਤੇ ਰਹੇ ਅਰ ਸਿੱਖੀ ਅਨਸਾਰੀ ਦੁਨੀਆ ਦਾ ਉਹ ਰਾਜ ਚੱਲੇ ਸਾਰੇ ਹੀ ਬਰੋਗ ਹੋ ਜਾਂਦੇ ਕੋਈ ਇਹ ਜਿਵੇਂ ਇੱਥੇ ਸਿੰਘ ਜੀ ਨੇ ਅਰਥ ਕੀਤੇ ਹਨ ਦਰੋਗ ਦੇ ਨਾਸ਼ਵੰਤ ਪਹਿਲਾਂ ਝੂਠਾ ਕੀਤੇ ਸੀਗੇ ਪਹਿਲੇ ਸ਼ਬਲ ਵਿੱਚ ਨਹੀਂ ਬਾ ਕੀਤੇ ਨੇ ਲਫ਼ਜ਼ ਦੇ ਸੰਧੀ ਵਿਸ਼ੇਸ਼ ਕਰਕੇ ਠੀਕ ਹੈ ਜੀ ਇਹ ਲਫ਼ਜ਼ ਦਾ ਅਰਥ ਕਰਨਾ ਨੇ ਅੰਦਾਜ਼ੇ ਨਾਲ ਨਹੀਂ ਕਰ ਸਕਦੇ ਸੰਧੀ ਵਿਸ਼ੇਸ਼ ਕਰੋ ਦਰੋਗ ਨਾਲ ਦੱਦਾ ਲਾ ਕੇ ਦਰੋਗ ਹੋ ਗਿਆ ਠੀਕ ਹੈ ਇਹ ਗਰਾਊਂਡ ਹੈ ਕੀ ਹੈ ਉਹਨਾਂ ਨੇ ਅਰਥ ਹਲਟੇ ਹਨ ਦਾ ਨਾਮ ਬੀਜ ਹੋਵੇ ਤਾਂ ਪ੍ਰਭੂ ਦੀ ਬਖਸ਼ਿਸ਼ ਬਹੁਤ ਇਕੱਠਾ ਹੁੰਦਾ ਹੈ ਤੇ ਸਾਰੀ ਦੁਨੀਆ ਝੂਠੀ ਦਿਸ ਪੈਂਦੀ ਹੈ ਉਹ ਐਂ ਲਿਖਦੇ ਹਨ ਝੂਠੀ ਪਹਿਲਾਈ ਦਿਸ ਕੀ ਪਤਾ ਝੂਠੀ ਉਹਨੂੰ ਇਹ ਪਤਾ ਕਿ ਝੂਠੀ ਹੈ ਤਾਂ ਪਤਾ ਲੱਗਦਾ ਝੂਠੀ ਦਿੱਦੀ ਹੈ ਜੂੜ ਨਾਲੇ ਜੀ ਉਹ ਦੁਨੀਆ ਝੂਠੀ ਦਿਸ ਪੈਂਦੀ ਐ ਜਿਸ ਦਾ ਤਾਂ ਪਹਿਲਾਂ ਜਪਦੇ ਨੂੰ ਹੀ ਐ ਜੋ ਦੀਦਾ ਹੋਈ ਦਾ ਝੂਠ ਐ ਉਹ ਮੰਨ ਲੈਂਦਾ ਕਿ ਨਹੀਂ ਮੰਨ ਕਰਦਾ ਮੰਨਣ ਦੀ ਗੱਲ ਕਰਦਾ ਠੀਕ ਐ ਜੀ ਹਾਂ ਸ਼ੁਰੂ ਤੋਂ ਫਿਰ ਆਏ ਪੜਾਂਗੇ ਨੂੰ ਸਾਵਣ ਰਾਤੀ ਦੇ ਕਾਮ ਕਰੋਦ ਦੋਏ ਖੇਤ ਲਭ ਦਰੋਗ ਬੀਓ ਹਾਲੀ ਰਾਹਕ ਹੇ ਇਹ ਗੱਲ ਹੈ ਕਿ ਸਾਵਣ ਰੂਪ ਹੋ ਜਾ ਜਿਹੜੇ ਨਾਮ ਰੰਗ ਰੰਗੀ ਕਰਤਾਰੀ ਨੂੰ ਕਿ ਹੈ ਦਰਸ਼ਨ ਵੀ ਹੋ ਗਿਆ ਪਰਸ਼ਨ ਵੀ ਹੋ ਗਿਆ ਸਰਸਣ ਵੀ ਹੋ ਗਿਆ ਹਰਸਣ ਵੀ ਹੋ ਗਿਆ ਦਰਸ਼ਨ ਪਰਸ਼ਨ ਦਰਸ਼ਨ ਰੰਗ ਰੰਗੀ ਕਰਤਾਰੀ ਨੂੰ ਕਾਹ ਹੁਣ ਟੈਂ ਕੀ ਕਰਨਾ ਉਹੀ ਬਣ ਜਾ ਹੁਣ ਤੂੰ ਆਜਾ ਮਦਾਨ ਚ ਤਲਵਾਰ ਲੈ ਕੇ ਗਿਆਨ ਸੰਗ ਚੱਡੀ ਬਣ ਜਾ ਚੱਡੀ ਦਾ ਰੂਪ ਤਾਂ ਗੱਲ ਹੈ ਲਾਬ ਲੋਗ ਖੇਤ ਬਣਾ ਲੈ ਜੰਗੋ ਖੇਤ ਉੱਡੀ ਹੁੰਦੀ ਹੈ ਬਸਣ ਦੇ ਪੈਰਾਂ ਥੱਲੇ ਖੇਤ ਦੇ ਵਿੱਚ ਕੁਝ ਨਹੀਂ ਰਹਿੰਦਾ ਜਿੱਥੇ ਜੰਗ ਹੁੰਦੀ ਹੈ ਦਾ ਪੜਣਾ ਕਬੀਰ ਜੀ ਵੀ ਕਹਿੰਦੇ ਨਾ ਖੇਤ ਜੋ ਮੰਡਿਓ ਸੂਰਮਾ ਕੰਦੇ ਹੁੰਦਾ ਖੇਤ ਹੀ ਕਰੋ ਨਵੇੜਾ ਠੀਕ ਹੈ ਜੀ ਹਲ ਵਿਚਾਰ ਵਿਕਾਰ ਮਨ ਹੁਕਮੀ ਹਲ ਵਿਚਾਰ ਵਿਕਾਰ ਮਨ ਹੁਕਮੀ ਖਾਏ ਨਾਨਕ ਲੇਖੈ ਮੰਗੀਐ ਔਤ ਜਣੇਂਦਾ ਹੈ ਬਾਰ-ਬਾਰ ਆਪਾਂ ਹਲਦੇ ਹਾਂ ਹਲ ਚਲਾਉਂਦੇ ਨਾ ਜਿਵੇਂ ਇਹਨੂੰ ਬਾਹਰ ਪੁਰੇ ਗਏ ਆ ਉਹ ਜਿਹੜੀ ਸ਼ਬਦ ਵਿਚਾਰ ਕਰਦੇ ਆ ਇਹ ਹਲ ਚੱਲਦਾ ਰੋਜ ਕੋ ਨਵਾਂ ਨਿਕੜੇ ਪਲਟ ਕਰਕੇ ਹਲਟ-ਪਲਟ ਨੂੰ ਇਹ ਹਲਟ-ਪਲਟ ਕਰੇ ਤੇ ਬਹੁਤ ਕੁਝ ਲੱਭਦਾ ਵਿਚੋਂ ਇਹ ਮੋਤੀਆਂ ਵਿੱਚ ਲੋਗਾਂ ਨੂੰ ਜਾਂਦੇ ਆ ਮੋਤੀ ਜਿੰਦੀ ਕਰਦੇ ਆ ਅਗੇ ਮੈਂ ਅਲੂਖਾਂ ਦੇ ਦੇ ਹਾਲ ਬਿਚਾਰ ਸ਼ਬਦ ਵਿਚਾਰ ਇੱਕ ਹਲ ਦਾ ਰੂਪ ਹੈ ਰੋਹ ਚਲਾਉਣਾ ਜਿਹੜਾ ਵਿਕਾਰ ਜਿਹੜੇ ਵਿਕਾਰਾਂ ਹਵਾ ਤੇ ਚਲਾਉਣਾ ਨਾ ਤਾਹੂਸ ਵਾਸੀ ਹੱਦ ਲੈ ਲੈ ਜੱਟ ਪੱਟੀ ਜਾਵੇ ਵਿਕਾਰਾਂ ਦੀ ਜੱਟ ਹਾਂਜੀ ਹਲ ਵਿਚਾਰ ਵਿਕਾਰ ਮਨ ਮੁਖਮੀ ਖੱਟੇ ਖਾਈ ਵਿਕਾਰ ਤੇ ਆਪਾਂ ਕੌਮਾ ਲਾਉਂਗੇ ਅੱਛਾ ਜੀ ਨਾ ਬਣਾ ਦੇ ਸਾ ਆਪਣਾ ਫਲ ਹੁੰਦੀ ਆ ਨਾ ਹਰ ਰਮਾ ਤੇ ਹਲ ਚਲਾਓ ਹਲ ਵਿਚਾਰ ਵਿਕਾਰ ਮਨ ਹੁਕਮੀ ਖੱਟੇ ਖੋੜੀ ਜਪ ਤੇ ਵਿਚਾਰ ਹੈ ਸ਼ਬਦ ਵਿਚਾਰ ਹੈ ਉਹ ਤਾਂ ਕਰਨੀ ਹੈ ਕਿਤੇ ਗਲਤੀ ਤਾਂ ਨਹੀਂ ਕੋਈ ਲੱਗੀ ਆਪਾਂ ਨੂੰ ਹਰਤ ਗਲਤੀ ਤਾਂ ਨਹੀਂ ਘਰ ਬੈਠੇ بار بار ਜਪਣਾ بار بار ਵਿਚਾਰ ਕਰਦੀਏ ਠੀਕ ਹੈ ਕਿਤੇ ਗਲਤੀ ਤਾਂ ਨਹੀਂ ਬਦ ਗਲਤੀ ਨਾਲ ਗਰਤੀ ਨਾਲ ਕੋਈ ਐਸਾ ਹੋਣਾ ਲੈ ਜੈਗੇ ਗੁੰਡੇ ਨਾਲ ਗੁੰਡ ਨੂੰ ਕਿਸੇ ਨੂੰ ਦਾਗ ਦੇਵੇ ਕੱਲੋਂ ਗੁੰਡਾ ਕੀ ਹੋ ਉਹਦੇ ਨਾਲ ਫਿਰ ਕੀ ਹੈ ਬਾਣ ਹੁਕਮੀ ਹੁਕਮੇ ਅਗਰ ਤੇ ਬੱਬੇ ਤੋਂ ਕਿਤੇ ਮਮਾ ਹੋਇਆ ਹੋਇਆ ਬਾਣ ਹੁਕਮੇ ਹੁਕਮੇ ਬਣ ਕੇ ਖੱਟੇ ਖਾਏ ਮਾਣ ਲੱਭਦਾ ਤਾਂ ਗੱਲ ਨਹੀਂ ਬਣਦੀ ਹੈਗੀ ਬੱਬੇ ਨਾਲ ਬੱਬੇ ਤੋਂ ਕਿਤੇ ਮਮਾ ਬਣਿਆ ਹੋਇਆ ਬਾਣ ਹੁਕਮੀ ਤਾਂ ਕੋਈ ਗੱਲ ਬਣੀ ਨਾ ਹੁਕਮੇ ਚੱਲਦਾ ਪ੍ਰਵਾਹ ਹਾਂ ਕਰਕੇ ਸੇ ਗੱਲ ਸਿਰ ਖਾਸਕਾ ਮੋਜੇ ਮੋਜੇ ਨਾ ਸਭ ਤੋਂ ਵਿਚਾਰ ਚਲਦੀ ਰਹਿਣੀ ਹੈ ਵਕਾਰ ਰਹਿਣਾ ਕੋਈ ਠੀਕ ਹੈ ਕਿਉਂਕਿ ਚਾਰ ਜਗਾ ਹੁੰਦਾ ਜੀ ਮਾਨ ਅਖਰ ਮੁਕਤਾ ਹਾਂ ਜੀ ਇੱਕ ਤਾਂ ਆ ਗਿਆ ਪਰ ਅੱਗੇ ਮਿੰਤੀ ਵਾਸਤੇ ਆਉਂਦਾ ਲਖਮਣ ਸੋਇਨਾ ਲਖਮਣ ਰੂਪਾ ਹਾਂ ਉਹ ਦਾ ਨੀ ਤੇ ਫਿਰ ਜੀ ਨਾ ਅੱਛਾ ਜੀ ਇੱਕ ਜਗ੍ਹਾ ਹੁੰਦਾ ਜੀ ਸਾਢੇ ਤਰੇਮਣ मन ਹੋਰੀ ਹਾਂ ਮਿੰਟੀ ਨਾਲ ਆਉਂਦਾ ਹਾਂਜੀ ਤੇ ਇਹ ਔਂਕੜ ਨਾਲ ਇੱਕ ਜਗ੍ਹਾ ਹੁੰਦਾ है, ਮਣ ਹਸਤੀ ਕਿਉ ਗੁੜ ਖਾਵੈ ਆਹੋ है, ਉਹ ਵੀ ਮਣ ਵਜਨੇ ਆ ਹਾਂਜੀ ਇਹਦੇ ਨਾਲ ਗਿਣਤੀਵਾਚਕ ਅੱਖਰ ਆਉਣਾ ਚਾਹੀਦਾ ਤਾਂ ਹੀ ਅਰਥ ਠੀਕ ਬਣਨਗੇ ਇਹਦੇ ਅੱਗੇ ਤਾਂ ਹੈ ਠੀਕ ਹੈ ਜੀ ਇਹ ਅਕਲਵਧੀ ਕੀਤੀ ਹੈ ਕਿਹਦੇ ਵਿਦਵਾਨ ਨੇ আচ্ছা ਜੀ ਇਹ ਫਿਰ ਵਿਕਾਰ ਤੇ ਰੁਕਾਂਗੇ ਜੀ ਹਲ ਵਿਚਾਰ ਵਿਕਾਰ ਜੀ ਵਿਚਾਰ ਦਾ ਵਿਕਾਰ ਆਸਤੇ ਜਿਵੇਂ ਆਪਾਂ ਗੋਡੀ ਕਰਦੇ ਹਾਂ ਗੋਡੀ ਕਰਦੇ ਬਾਅਦ ਕਰਦੇ ਆ ਜਿਹੜਾ ਕਾਫੂਸ ਹੈ ਵਿੱਚੋਂ ਕਢਦੀ ਹੈ ਫਸਲ ਚੋਂ ਸ਼ਬਦ ਵਿਚਾਰ ਕਿਉਂ ਕਰਦੇ ਆ ਕਿਤੇ ਗਲਤੀ ਨਾਲ ਕੋਈ ਗਲਤ ਤਾਂ ਨਹੀਂ ਅਰਥ ਸਮਝੀਏ ਠੀਕ ਹੈ ਜੀ ਫਿਰ ਇਹਨੂੰ ਪੜਾਂਗੇ ਜੀ ਹਲ ਵਿਚਾਰ ਵਿਕਾਰ ਬਣ ਹੁਕਮੀ ਖੱਟੇ ਖਾਏ ਨਾਨਕ ਲੇਖੈ ਮੰਗੀਐ ਔਤ ਜਣੇਂਦਾ ਜਾਏ ਜਿਹੜੇ ਮੰਗਦੇ ਨੇ ਨਾ ਬਿਨ ਮੰਗੇ ਮੋਤੀ ਮਿਲੇ ਮੰਗੇ ਮਿਲੈ ਨਾ ਭੀਖ ਬੰਦੜ ਨਾ ਤਾਂ ਸਾਨੂੰ ਆਲੜੇ ਨਹੀਂ ਕਿਰਪਾ ਕਰੋ ਹਰਿ ਬਾਕੀ ਤਾਂ ਹੁਕਮ ਜਦ ਮੈਨੂੰ ਮੰਗਿਆ ਹੀ ਦਿੰਦਾ ਉਹ ਦਵਾਈ ਨਾਲ ਤਾਂ ਮੰਗੇ ਨਹੀਂ ਲਈਦੀ ਹੁੰਦੀ ਡਾਕਟਰ ਦਵਾਈ ਮਰਜੀ ਨਾਲ ਦਿੰਦੇ ਤੁਸੀਂ ਮਿੱਠੀ ਦਵਾਈ ਮੰਗੋ ਤੁਹਾਨੂੰ ਬੈਠੇ ਯੂਗਰ ਡਾਕਟਰ ਕਵੇਂ ਦੇ ਦੂਗਾ ਇਸ ਕਰਕੇ ਨਹੀਂ ਇਹ ਲੇਖਾ ਮੰਗੀਏ ਦੀ ਗੱਲ ਆ ਰਹੀ ਐ ਇਹ ਤਾਂ ਨੀ ਜਿਵੇਂ ਅੱਗੇ ਹੈਗਾ ਬੈਠਾ ਬੁਖੋਲ ਬਹੀ ਉਸ ਤਰ੍ਹਾਂ ਤਾਂ ਨਹੀਂ ਨਾਨਕ ਮੰਗਦਾ ਉਹ ਤੇਰਾ ਲੇਖਾ ਲਿਖਿਆ ਜਾਣਾ ਉਹ ਕੱਟ ਕੇ ਤੈਨੂੰ ਦੇ ਦੇਵੇ ਤੇਰਾ ਐਸਾ ਤੈਨੂੰ ਆਪੇ ਦੇਈ ਜਾਂਦਾ ਹਾਂਜੀ ਉਹ ਜਨਿੰਦਾ ਜਾਏ ਉਹ ਜਿਹੜਾ ਹੁੰਦਾ ਉਹਦੇ ਔਲਾਦ ਦੀ ਇਹ ਰਾਜਨੀਤ ਹੋਣੀ ਇਹਨੂੰ ਪੁੱਤਾ ਜਿਹਨੂੰ ਕਹਿੰਦੇ ਨੇ ਹਾਂਜੀ ਜਾਏ ਆ ਉਹ ਉਲਾਦ ਵਾਲਾ ਬੰਦਾ ਹੋਇਆ ਆਪਣੇ ਆਪ ਨੂੰ ਕਿਉਂਕਿ ਬਹੁਤ ਸਾਰੀ ਔਲਾਦ ਪੈਦਾ ਕਰਨ ਨੂੰ ਉਹ ਨਹੀਂ ਮੰਗੇ ਤੇ ਮਿਲਦਾ ਕੁਝ ਵੀ ਉਹ ਕਮਨਾ ਕਰ ਵੀ ਮੇਰੀ ਹੋਈ ਹੈ ਦੇ ਦੇ ਦੇ ਕਿਸੇ ਨੂੰ ਦੇ ਕਿਸੇ ਨੂੰ ਪੁੱਤ ਨਾ ਦੇ ਸਾਰੇ ਪੁੱਤ ਮੈਨੂੰ ਇਹ ਦੇ ਦੇ ਉਹਦਾ ਉਹ ਗੱਲ ਹੈ ਇਹ ਜੀ ਖਾਏ ਜਿਹੜੀ ਹੈ ਵੀ ਕਿਸੇ ਰੱਬਾ ਕਿਸੇ ਨੂੰ ਪੁੱਤ ਨਾ ਦੇ ਦੁਨੀਆ ਦੇ ਸਾਰੇ ਪੁੱਤ ਮੇਰੇ ਘਰੇ ਪੈਦਾ ਹੋ ਜਾਣ ਦੇ ਖਾਜਾ ਅੱਖ ਗਵਾਈ ਹੈ ਜੋ ਦਿੱਤਾ ਖਾ ਲੋ ਮੰਗ ਕੇ ਤਾਂ ਭਰੋਸਾ ਗਵਾਲੀ है, ਉਹ ਕਹਿੰਦਾ ਇਹਨੂੰ ਤਾਂ ਮੇਰੇ ਤੇ ਭਰੋਸਾ ਹੀ ਨਹੀਂ ਆਖ ਕੇ ਤਾਂ ਮੰਗ ਕੇ ਵਾਲੀ ਦੀ ਆਪਣਾ ਦੇਵਸ਼ਰਸੀ ਪੈਦਾ ਹੋ ਜਾਂਦੀ ਹੈ ਪਰਮੇਸ਼ਰ ਨਾਲ ਮੰਗਣ ਤੇ ਹਾਂਜੀ ਮਹੱਲਾ ਪਹਿਲਾ ਪਉ ਪੁਇ ਪਵਿੱਤ ਪਾਣੀ ਸਤ ਸੰਤੋਖ ਬਲੇਦ ਹਲ ਹਲੇਮੀ ਹਾਲੀ ਚਿੱਤ ਚੇਤਾਵਤਰ ਵਖਤ ਉਹ ਪੂਰੇ ਬਣੇ ਹਿਰਦੇ ਚ ਪ੍ਰੇਮ ਹੋਵੇ ਮਤਲਬ ਹਿਰਦਾ ਪ੍ਰੇਮ ਦੇ ਨਾਲ ਭਰਪੂਰ ਹੋਵੇ ਪੁਆਇ ਪੁਆਇ ਹਿਰਦਾ ਹੁੰਦਾ ਜ਼ਮੀਰ ਠੀਕ ਹੈ ਜੀ ਹਿਰਦੇ ਚ ਪ੍ਰੇਮ ਹੋਵੇ ਪਵਿੱਤਰਤਾ ਹੋਵੇ ਧਰਤੀ ਤੇ ਜਿਹੜੀ ਪ੍ਰੇਮ ਜਿਹਦੇ ਵਿੱਚ ਹੋਵੇ ਹਿਰਦੇ ਚ ਉਹਦੇ ਚ ਨਾਮ ਦਾ ਸਪੈਜਵੇ ਗਿਆਨ ਜਿਹੜਾ ਹੈਗਾ ਗੁਰਬਾਣੀ ਦਾ ਗਿਆਨ ਰੂਪੀ ਪਾਣੀ ਪੈਜਵੇ ਰਾਮੋਦਕ ਜਿਹੋ ਤੇ ਪੈਜਵੇ ਤੇ ਬਲੇਦ ਕੀ ਹੁੰਦਾ ਬਲੇ ਬੜ ਲੈਣਾ ਅੱਛਾ ਇਹਨਾਂ ਨੇ ਬਲੇ ਕਰਤਾ ਅਰਥ ਵੀ ਉਹ ਬਲਦ ਹੁੰਦਾ ਬਲੇ ਹੁੰਦਾ ਬੰਨ ਲੈਣਾ ਕਿਸੇ ਚੀਜ਼ ਨੂੰ ਚਾਰੇ ਪਾਸੇ ਰੱਸਾ ਮਾਲ ਲੈਣਾ ਬੜ ਲੈਣਾ ਐਸਾ ਸੰਦੋਖ ਹੋਵੇ ਜਿਹੜਾ ਟੁੱਟ ਨਾ ਸਕੇ ਬਿਲਕੁਲ ਜਿਹਨੂੰ ਕਟਿਆ ਹੀ ਨਹੀਂ ਸਕਦਾ ਸੰਦੋਖ ਐਸਾ ਜਿਹਨੂੰ ਮਾਇਆ ਤੋੜੇ ਨਹੀਂ ਸਕਦੀ ਕੋਈ ਸ਼ਕਤੀ ਤੋੜ ਨਹੀਂ ਸਕਦੀ ਜਿਹੜੀ ਦੱਸੀ ਨੂੰ ਸੰਦੋਖ ਐਸਾ ਹੋਵੇ ਸੱਤ ਸੰਦੋਖ ਹਾਂ ਸੱਤ ਸੰਦੋਖ ਬਲੇ ਮਨ ਵੜਿਆ ਜਾਂਦਾ ਘਿਰ ਜਾਂਦਾ ਮਨ ਰੁਕ ਜਾਂਦਾ ਉਦਾ है ਮਾਨ ਰੁਕ ਜਾਂਦਾ ਹੈ ਗਿਆਨ ਦਾ ਵੱਡਾ ਬਣਦਾ ਹੈ ਠੀਕ ਹੈ ਜੀ ਸਤ ਸੰਤੋਖ ਦਾ ਤੱਗ ਹੋ ਗਿਆ ਸਮਝੋ ਤੱਗ ਨੇ ਮਨ सी ਬਸ ਕਰ ਲਿਆ ਹਾਂ ਜੀ ਹਾਂ ਤਾਗੇ ਨਾਲ ਤਾਗੇ ਨਾਲ ਬੰਨ ਲਿਆ ਵੀ ਇਹ ਚਲ ਬਹਾਲ ਲੈ ਜੇ ਸਰੀਰ ਦਾ ਜਿਨੇਊ ਆ ਤੁਸੀਂ ਨਹੀਂ ਮੰਨਦੇ ਅੰਦਲੇ ਦਾ ਆ ਇਹੋ ਪਾਓ ਇੱਕ ਹੋਰ ਕੱਲੇ ਜਿਨੇਊ ਨਾ ਨਹੀਂ ਗੱਲ ਬਣਦੀ ਹਾਲ ਹਲੇਮੀ ਹਾਲੀ ਚਿੱਤ ਚੇਤਾ ਵਤਰ ਵਕਤ ਸੰਜੋਗ ਹੁਣ ਹਾਲੀ ਜਿਹੜਾ ਹੈਗਾ ਜਿਹੜੀਆਂ ਨਕੀਰਾਂ ਅੱਗੇ ਕੱਢਣੀਆਂ ਨੇ ਜਿੱਥੇ ਜਿੱਥੇ ਹਰ ਚਲਾਉਣਾ ਹੈ ਨਾ ਉੱਤੇ ਹਲੇਵੀ ਉਹ ਤੇਰੀ ਸ਼ਕਤੀ ਦੇ ਬੋਲ ਚਾਹੀਦੇ ਸ਼ਕਤੀ ਦੇ ਬੋਲ ਚਾਹੀਦੇ ਨੇ ਜੋ ਰੰਗ ਖੋਰ ਜਿਹੜੇ ਨੇ ਦੂਜੇ ਨਹੀਂ ਸਾਖਤੀ ਹੋਣਾ ਵਾਸਤੇ ਸ਼ਕਤੀ ਉਹ ਮੱਤ ਜਿਹਨਾਂ ਦੇ ਅੰਦਰ ਹੈ ਉਹਨੂੰ ਤੋੜਨ ਵਾਸਤੇ ਉਹ ਬੋਲਣੇ ਪਰ ਡਣ ਵਾਸਤੇ ਬੀਜਣ ਵਾਸਤੇ ਵੀ ਬੀਜਣ ਵਾਸਤੇ ਹਲੇਵੀ ਬੀਜਣ ਵੇਲੇ ਧਰਤੀ ਜਾਂ ਤਿਆਰ ਕਰਦੀ ਹੈ ਫਲ ਹਲੇਵੀ ਅਜਾ ਪ੍ਰੇਮ ਦੀ ਇਬਰਤਾ ਦੀ ਹਾਲੀ ਚਿੱਤ ਮਨ ਆਲੀ ਨਹੀਂ ਮਰਨਾ ਕਦੇ ਵੀ ਬੰਦੇ ਤੇ ਚਿੱਤ ਮੰਗਾ ਹੈ ਹੋਰੀ ਹੁਣ ਇਸ ਵੇਲੇ ਸਤਗੁਰੂ ਦੀ ਸੇਵਾ ਸ਼ੁਰੂ ਹੋਗੀ ਹਾਲੇਲੇ ਹਾਲੀ ਚਿੱਤ ਸਤਗੁਰੂ ਦੀ ਸੇਵਾ ਸਭਲਾ ਜੇ ਕੋ ਕਰੇ ਕਿਤਨਾ ਚਿੱਤ ਚੇਤਾ ਵਤਰ ਵਤਸਜੋਗ ਜਿਤਨਾ ਇਹ ਚਿੱਤ ਦੇ ਤੇ ਤੇ ਅਸਰ ਹੋ ਤੇ ਜੇ ਮੰਤਿਆਸ ਰੋਗ ਹੋ ਵੀ ਚਿੱਤੇ ਬੰਦ ਗਿਆ ਬੱਤਰ ਵਕਤ ਸੁਜੋਗ ਉਧਰ ਬੱਤਰ ਹੋਵੇ ਉਧਰ ਵਕਤ ਹੋਵੇ ਤਾਂ ਕਿਤੇ ਸੁਜੋਗ ਹੁੰਦਾ ਕਿੰਨੇ ਘੜੀਆਂ ਮਹਿਣਾ ਕਿਰਪਾ ਹੋਵੇ ਕੁਝ ਇਹ ਚਾਹੁੰਦਾ ਹੋਵੇ ਕੁਝ ਬੋਲਣ ਵਾਲੇ ਦੇ ਪੱਲੇ ਹੋਵੇ ਕੁਝ ਪਰਮੇਸ਼ਰ ਚਾਹੁੰਦਾ ਹੋਵੇ ਕੁਝ ਲੈਣ ਵਾਲਾ ਪਰ ਮੈਂ ਕਹਿੰਦਾ ਜੋ ਜੋਗ ਮਲਾਇਆ ਹੋਵੇ ਕੁਛ ਲੈਣ ਵਾਲੇ ਦੀ ਇੱਛਾ ਹੋਵੇ ਤਾਂ ਤਾਂ ਕੁਝ ਉਗਦਾ ਤਾਂ ਇਸਰੇ ਚੜਦੀਏ ਨਹੀਂ ਤਾਂ ਬਸ ਬੂਹਾ ਕਾ ਕੇ ਆ ਬੋਈ ਹੈ ਤੇ ਹਾਲੀ ਚ ਕੀ ਫਰਕ ਹੁੰਦਾ ਜੀ ਹਾਲੀ ਚ ਵਾਲਾ ਹਾਲੀ ਜਿਹੜਾ ਚਲਾਉਣੇ ਗਿਆਨ ਦਾ ਚਲਾਉਣਾ ਹਾਲ ਦਾ ਗਿਆਨ ਦਾ ਹੀ ਨਾ ਉਹਨੂੰ ਕਿਵੇਂ ਗਿਆਨ ਸ਼ਬਦ ਕਿਵੇਂ ਦੇਣੇ ਜੀ ਬਤ ਰੋ ਹਾਲ ਫਿਰ ਮਨ ਹੈ ਜੀ ਹਲ ਹਲੀਮੀ ਬਾਂਥੋੜੀ ਆ ਲੇਮੀ ਹੈ ਲੇਮੀ ਨੇ ਵਰਤੌ ਦੀ ਵਾਲੇ ਵੀ ਤਾਂ ਨਹੀਂ ਪਰ ਹਾਲ ਹਾਲ ਔਰ ਹਾਲੀ ਦਾ ਕੀ ਫਰਕ ਹੈ ਆਪਸ ਚ ਹਰ ਗਿਆਰਾ ਹਾਲੀ ਦੇਣ ਵਾਲਾ ਵਾਲੇ ਦੇ ਹੱਥ ਕੁਝ ਨਹੀਂ ਐ ਦੱਖਣ ਵਾਲੇ ਦੇ ਹੱਥ ਕੁਝ ਕੀ ਹੈ ਸਭ ਦਾ ਗੱਲ ਨਾ ਲਈ ਥੱਲੇ ਜਿਹਦਾ ਬਾੜਾ ਕੈਮ ਹੈ ਵੱਡੀਆਂ ਜਗ੍ਹਾ ਨੂੰ ਵੱਲ ਕੇ ਪਰੇ ਮਾਰੂਗਾ ਜਿਹੜੇ ਪਹਿਲੇ ਪੁੱਟੇ ਨੇ ਉਹ ਵੀ ਤਾਂ ਪੁੱਟੜੇ ਨੇ ਹਾਲੇ ਨੇ ਉਹ ਦੇ ਆਲ ਚੱਲਣੇ ਹੁਣ ਗੁਰਮਤ ਦਾ ਯਾਰ ਚੱਲਣਾ ਹੈ ਹੋਰ ਦਾਦਾ ਹਾਲੀ ਜਿਹੜਾ ਬੋਲਣ ਵਾਲਾ ਦੱਸਣ ਵਾਲਾ ਹਾਲੀ ਹੈ ਅੱਛਾ ਜੀ ਸਮਝਾਉਣ ਹੈ ਜੋ ਕੀ ਸਮਝਾਈ ਜਾ ਰਹੀ ਹੈ ਗੁਰਮਤ ਉੱਤਰ ਉਹਦੇ ਅੰਦਰ ਉਹਨੀ ਗਹਿਰਾਈ ਤੇ ਜਿਹੜਾ ਪੱਟੀਆਂ ਨੇ ਜਾਂ ਫਿਰ ਬੜੇ ਦਰਸਤਾ ਵੀ ਉਹਨੀਆਂ ਸਾਰੀਆਂ ਬਿਮਾਰੀਆਂ ਬਾਹਰ ਕੱਢ ਲਈ ਉਹਦੇ ਸਾਰੀਏ ਧੁੱਪ ਲੱਗੀ ਦੱਸੋ ਬੁੱਧੀ ਨੂੰ ਕਿਹਾ ਵੀ ਬੁੱਧੀ ਬੁੱਧੀ ਅੱਜ ਤੱਕ ਨਾ ਹੋਈ ਕੋਈ ਤੇ ਬੁੱਧੀ ਕਹਿੰਦਾ ਕਿ ਟਿਕਾ ਲਓ ਬੁੱਧੀ ਕਹੇ ਉਹਦੇ ਉਹਦੇ ਚੇਤਨੈ ਤੇ ਕੋਈ ਵਰਤ ਨਹੀਂ ਹਾਲ ਨੇ ਮਾਉਣਾ ਹੈ ਨਾ ਗੁਰਮਤ ਨਹੀਂ ਬੋਣਾ ਸਾਡੇ ਕੋ ਗੁਰਮਤ ਨਾ ਹੋਵੇ ਹੜੇ ਨਾ ਹੋਵੇ ਚਿੱਤ ਕੀ ਕਰ ਲੂ ਗੁਰ ਕੀ ਕਰ ਆ ਰਿਹਾ ਹਾਲੀ ਤੋਂ ਆ ਰਿਹਾ ਹਾਂ ਜੀ ਚੇਤਨ ਨਹੀਂ ਠੀਕ ਹੈ ਉਹ ਠੀਕ ਹੈ ਪਰ ਹੈ ਕੌਣ ਪਰਮੇਸ਼ਰ ਦਾ ਕੰਮ ਆਜ ਵੀ ਰੂਪ ਤੇ ਕਿੰਨੇ ਕਹੋਗੇ ਯਾਹ ਹਾਲੀਏ ਬਣਦਾ ਤੇ ਤੇ ਤੇ ਤ੍ਰਿਤੀਆ ਤੀਨੇ ਸੰਕਰ ਲਿਆ ਵੇ ਆਨੰਦ ਮੂਡ ਪਰ ਬਦ ਗਾਵੇ ਉਨੇ ਦਿਨ ਹੈਗੇ ਠੀਕ ਇਸ ਵੇਲੇ ਤੈਨੂੰ ਹੁਣ ਉਹਦਾ ਇਲਾਜ ਕਰਦਾ ਇਹ ਤੇ ਤੈਨੂੰ ਨੇ ਪਹਿਲਾਂ ਇਹੇ ਆਪ ਤੈਨੂੰ ਤੇ ਹੁਣ ਡਾਕਟਰ ਹੈ ਮੇਲਾ ਫਰੀਦ ਸੀ ਇਹ ਇਹ ਡਾਕਟਰ ਹੈ ਹਲੇ ਵੀ ਕਹਿੰਦੇ ਹੁਣ ਹਲੇ ਵੀ ਆ ਗਈ ਹੁਣ ਕਰੂਰਤਾ ਛੱਡਤੀ ਬੋਲਣੀ ਬਿਟ ਬੋਲ ਜੀ ਹਰ ਸਵਾਮੀ ਮੋਹਰਾ ਸੰਤ ਨੇ ਲੈ ਕਹੀਏ ਮੇਲੇ ਅਸੰਤ ਮਸਤ ਕਰ ਲਈਏ ਕਹਿੰਦਾ ਜੇ ਅਸੰਤ ਹੋਵੇ ਉੱਥੇ ਬੋਲੋ ਹੀ ਨਾ ਉਤੇ ਹਲੇਮੀ ਨਾਲ ਗੱਲ ਕਰੋ ਆਪਾਂ ਝਗੜਾ ਉਹਨਾਂ ਨੇ ਮੰਨਣਾ ਨਹੀਂ ਆਪਾਂ ਝਗੜਾ ਕਰਨਾ ਹਲੇਮੀ ਦਾ ਮਤਲਬ ਇਹ ਹੈ ਠੀਕ ਹੈ ਜੀ ਹਲ ਹਲੇਮੀ ਹਾਲੀ ਚਿੱਤ ਚੇਤਾਵਤਰ ਵਕਤ ਸੰਜੋਗ ਜਿਨਾਂਕ ਚੇਤਾ ਹੈ ਜਿਨਾਂਕ ਚੇਤਨ ਹੈ ਕੋਈ ਜਿਨਾਂਕ ਚੇਤਨ ਤੋਂ ਹੈ ਜਿਨਾਂ ਤੇਰੇ ਕੋ ਗਿਆਨ ਹੈ ਵਕਤ ਮਿਲਦਾ ਹੈ ਹੁੰਦਾ ਕਿਸੇ ਨਾਲ ਮੇਲ ਹੁੰਦਾ ਉਹਨਾਂ ਕੋ ਪਰਿਕਾਰ ਮੀਟੀ ਚਲਗਾ नहीं ਇਹ ਉਸ ਤਰ੍ਹਾਂ ਨਹੀਂ ਹੈਗਾ ਜੇ ਕੋਈ ਤਾਂ ਹੋਵੇ ਰੁੱਤੀ ਹੋ ਰੁੱਤ ਹੋਏ ਇਹ ਵਖਤ ਰੁੱਤ ਦੀ ਗੱਲ ਵਾਸਤੇ ਆ ਰਹੀ ਆ ਜੀ ਉਹ ਆਪਣੇ ਅੰਦਰ ਦੀ ਗੱਲ ਹੈ ਜੀ ਜੋ ਹੋਵੇ ਵੀ ਚਾਹੇ ਜੇ ਰੁੱਤ ਨਹੀਂ ਹੋਵੇ ਤਾਂ ਜ਼ਮਦਾਰ ਇਹ ਤਾਂ ਰੁਕਤ ਹੈ ਹੁਣ ਤਾਂ ਸੱਚ ਨਾਲ ਗੱਲ ਹੈ ਇੱਥੇ ਜਿੱਥੇ ਕਹਿੰਦੇ ਤੁਹਾਨੂੰ ਸੰਤ ਮਿਲੇ ਕੋ ਸੁਣੀਏ ਠੀਏ ਮਿਲੇ ਅਸੰਤ ਬੰਸ ਕਰ ਰਹੀ ਹੈ ਜੇ ਸੁਝਾਓ ਹੋ ਜਾਂਦਾ ਕੋ ਸੰਤ ਮਿਲਦਾ ਉੱਥੇ ਠੀਕਾ ਲਾ ਦੋ ਗੱਲ ਕਰ ਦੋ ਜੇ ਕੋਈ ਉਹਦੇ ਅੰਦਰ ਗਲਤ ਫਹਿਮੀ ਹੈ ਉਹਨੂੰ ਹਲੇਮੀ ਨਾਲ ਦੂਰ ਕਰੋ ਸਮਝਾ ਕੇ ਹਲੇਮੀ ਦੇ ਸ਼ਬਦ ਵਰਤੋ ਜੜ ਤਾਂ ਪੁੱਟਣੀ ਹੈ ਉਹਦੀ ਜੜੂਰ ਆਪਾਂ ਨੇ ਕਿਹੜਾ ਗਲਤ ਪੌਦਾ ਖੜਾ ਹੈ ਕਦੇ ਖੜੀ ਹੈ ਪਰ ਹਲੇਮੀ ਨਾ ਪੁੱਟਣੀ ਹਮਦਰਦੀ ਨਾਲ ਉਹਨੂੰ ਸਮਝਾਉਣਾ ਤੇਰੇ ਫਾਇਦੇ ਦੀ ਗੱਲ ਆ ਬੰਨ੍ਹਣੀ ਨਾਮ ਬਦਲੀ ਤੇਰੀ ਮਰਜ਼ੀ ਜਿੱਥੇ ਵਿੱਚ ਜੋ ਚੇਤਾ ਆ ਆਸਾਸ਼ਤਾ ਸਾਡੀ ਜੋ ਸਾਡੇ ਕੋਲ ਗਿਆਨ ਹੈ ਵਕਤ ਜੇ ਮਿਲੂਗਾ ਸਹਯੋਗ ਹੋਊਗਾ ਉਹੀ ਦਵਾਂਗੇ ਉਹ ਆਪਣੇ ਅੰਦਰ ਪਾਣੀ ਦੂਏ ਦੇ ਨਮੀ ਦੂਏ ਦੇ ਅੰਦਰ ਜਾਊਗੀ ਦੇਖੇ ਤੇ ਅੰਦਰ ਜੋ ਪਾਣੀ ਹੈ ਵੇ ਉਹੀ ਵਰਸੂਗਾ ਦੂਏ ਦੇ ਘਰ ਜਾ ਕੇ ਹੋਰ ਕਿੱਥੇ ਲੈ ਕੇ ਆਊਗਾ ਇਹ ਗੱਲ ਹੋਰ ਤਰੀਕੇ ਨਾਲ ਕਹਿਤੀ ਹੋਰ ਤਰੀਕੇ ਨਾਲ ਗੱਲ ਪਾਗਨਾ ਹੋਈ ਹੈ ਸ਼ਬਦਾਂ ਦਾ ਫਰਕ ਠੀਕ ਇਥੇ ਪੱਤਰ ਕਹਿੰਦਾ ਜਿੰਨਾ ਕ ਬੱਦਲ ਚ ਪਾਣੀ ਹੈ ਉਹਨਾਂ ਕ ਬਰਸ ਜੂਗਾ ਠੀਕ ਹੈ ਜੀ ਵਕਤ ਸੰਯੋਗ ਤੋਂ ਕੀ ਭਾਵਨਦਾ ਹੀ ਇਹ ਲੈਣਾ ਮਿਲਿਆ ਨਾਨਕ ਨਾ ਠੀਕ ਹੈ ਜੀ ਹਲੇ ਵੀ ਦਾ ਚਲਾ ਦੇ ਜਿਹੜੀ ਪੱਥਰ ਵੀ ਬਣੋਤੀ ਪੁੜਤੀ ਅੰਦਰ ਕਾਣੀ ਦਾ ਲੈ ਸਕਦੇ ਆਂ ਵੀ ਉਹ ਕਿਸੇ ਨੂੰ ਸਮਾਰ ਸਕਦੇ ਹੋ ਥੋੜੀ ਗੱਲ ਕੋਈ ਬਣ ਸਕਦਾ ਹੈ ਹਲੇ ਵੀ ਨਾਲ ਜੇ ਤੁਸੀਂ ਦੂਆ ਭਾਸ਼ਾ ਵਰਤੋਗੇ ਠੇਡੀਆਂ ਗੱਲ ਕਿਸੇ ਨੇ ਮੰਨਦੀ ਪਰ ਕੋਈ ਮੰਨ ਲਵੇ ਤੁਹਾਡੇ ਨਾਲ ਰੂ ਐਕਸੈਪਟ ਕਰਨ ਦੀ ਚਾਹਨਾ ਹੋਵੇ ਉੱਥੇ ਲੋੜ ਨਹੀਂ ਹੈ ਜੇ ਉਹਦੇ ਅੰਦਰ ਕੋਈ ਬਨੌਤ ਗਲਤ ਹੈ ਵੀ ਉਹਨੂੰ ਪ੍ਰੇਮ ਦੀ ਭਾਸ਼ਾ ਦੇ ਨਾਲ ਵੀ ਦੂਰ ਕੀਤਾ ਜਾ ਸਕਦਾ ਅੰਦਰ ਇੱਛਾ ਹੈ ਬਦਲਣ ਦੀ ਜਿਗਿਆਸੂ ਹੈ ਜੇ ਜਿਗਿਆ ਸੂਣਾ ਹੋਰ ਤਰ੍ਹਾਂ ਦੀ ਬੋਲੀ ਬੋਲਣੀ ਹੈ ਸਾਖਤ ਨੂੰ ਹੋਰ ਤਰ੍ਹਾਂ ਦੀ ਬੋਲੀ ਬੋਲਣੀ ਹੈ ਐਵੇਂ ਕਰ। ਯਾ ਸੰਜੋਗ ਦਾ ਵਰਕਆਊ ਦਾ ਇਸ ਤਰੀਕੇ ਦਾ ਹਾਲਾ ਦੀ ਬੋਲੀ ਚਾਹੀਦੀ। ਠੀਕ ਹੈ ਜੀ। ਹਾਂ ਜੀ। ਬੀਜ ਬਖਸ਼ੀਸ਼ ਬੋਹਲ ਦੁਨੀਆਂ ਸਗਲ ਦਰੋਗ ਨਾਨਕ ਨਦਰੀ ਕਰਮ ਹੋਏ ਜਾਵੇਂ ਸਗਲ ਵਿਜੋਗ। ਜਿਗਿਆ ਜੀ ਇਹ ਵੀ ਦਾ ਨਾਮ ਹੈ ਅਗਲੇ ਦੇ ਅੰਦਰ ਵੀ। ਜੋ ਸਕੇ ਅਦੇ ਲੀਨਿਆਤਾ ਨਾਵੇਂ ਵੀ ਸਕੇ ਅਦੇ ਕਿ ਵਿਜਣਾ ਦਾ ਨਾਵੇਂ ਜੇ ਬਖਸ਼ਿਸ਼ ਹੋ ਸੇ ਬੋਲ ਉਹਦੇ ਬਰਾਬਰ ਤਿਆਰ ਹੋ ਜਾਣਾ ਪਰ ਮੇਸ਼ਰ ਦੀ ਬਖਸ਼ਿਸ਼ ਉਹ ਬੋਲ ਲੱਗੇ ਕਿਆ ਲੱਗਦਾ ਸਗਲ ਦਰੋਗ ਆਹ ਦੁਨੀਆ ਸਗਲ ਦਰੋਗ ਦੁਨੀਆ ਜਿਹੜੀ ਜਿਹੜੀ ਲੈਣੀ ਦੇਊਗੀ ਰੋਗ ਰਹਿਤ ਬਿਲਕੁਲ ਨੋ ਚਾਹ ਹੋਊਗਾ ਜਿਹੜਾ ਰੋਗ ਰਹਿਤ ਮੋਨਾ ਚਾਹੁੰਦਾ ਰਹੂ ਕੁਝ ਹੋ ਸਕਦਾ ساری ਦੁਰੀਦ ਰੋਗ ਹੋ ਸਕਦੀ ਹੈ ਪਰ ਜੇ ਕੋ ਖਾਵੇ ਜੇ ਕੋ ਪੁੱਛੇ ਕਿੱਥਾ ਹੋਏ ਓਦਾਰ ਇਹ ਤਾਂ ਸ਼ਰਤ ਹੈ ਦੋ ਆਈ ਵੀ ਜ਼ਰੂਰ ਨਾਮਦਾਰੂ ਦੀ ਇਹ ਤਾਂ ਸ਼ਰਤ ਹੈ ਉਹ ਦੁਨੀਆ ساری ਦਰੋਗ ਹੋ ਸਕਦੀ ਹੈ ਹਾਂਜੀ ਨਾਨਕ ਨਦਰੀ ਕਰਮ ਹੋਏ ਜਾਵੇਂ ਸਗਲ ਵਿਯੋਗ ਨਾਨਕ ਕਹਿੰਦੇ ਜੇ ਕਿਰਪਾ ਹੋਵੇ ਨਰਮੀ ਕਰਮ ਹੋਵੇ, ਕਰਪਾ ਹੋਵੇ, ਵੇਰ ਹੋਵੇ ਪਰਮਾਤਮਾ ਦੀ। ਔਰ ਇਹਦਾ ਆਪਣਾ ਵੀ ਇੱਛਾ ਹੋਵੇ। ਬਸ ਫੇ ਸਾਰੇ ਬਚੋਬ ਰਹਿ ਜਾਂਦੇ ਨੇ। ਫੇ ਤਾਂ ਕੋਈ ੜਕਾ ਹੈ ਹੀ ਸਾਡਾ ਆਪਣਾ ਉਹ ਜਿਹੜਾ ਹੈਗਾ ਉਹ ਤੇ ਆਪ ਦੀ ਮਨ। ਆਪਣੀ ਉਸਲਾ ਹੈ ਜੀ। ਬਾਕੀ ਗੁਰਬਾਣੀ ਵੀ ਹੈ, ਗੁਰਬਾਣੀ ਦੀ ਵਿਚਾਰ ਵਾਲੇ ਵੀ ਰਹੇ ਨੇ, ਭਗਤ ਵੀ ਰਹੇ ਨੇ। ਪਰ ਮੇਰੀ ਸ਼ਰਧੀ ਵੀ ਇੱਛਾ ਸੀ ਉਹਨੇ ਪੜ ਕਟਾਇਆ ਕਿਉਂ ਸੀ ਜੁਗ ਜੁਗ ਉਪਾਏ ਕਿਉਂ ਸੀ ਵੀ ਦੁਨੀਆ ਦੇ ਦਰੋਗ ਹੋ ਜਵੇ ਦੁਨੀਆ ਦੇ ਲੋਕ ਜਿਹੜੇ ਦਰੋਗ ਹੋਣਾ ਚਾਹੁੰਦੇ ਨਹੀਂ ਉਹਨਾਂ ਦੀ ਮਰਜ਼ੀ ਜਿਹੜੇ ਚਾਹੁੰਦੇ ਨੇ ਹੋ ਜਾਂਦੇ ਨੇ ਸਾਰੀਓ ਦੁਨੀਆ ਹੋ ਸਕਦੀ ਐ ਜਦੋਂ ਤੇ ਚਾਹੇ ਪਸਾ ਠੀਕ ਹੈ ਜੀ ਪੌੜੀ ਮਨਮੁਖੀ ਮੋਹ ਗੁਬਾਰ ਹੈ ਦੂਜੇ ਪਾਏ ਬੋਲੇ ਦੂਜੇ ਪਾਏ ਸਦਾ ਦੁੱਖ ਹੈ ਨਿਤ ਨੀਰ ਵਿਰੋਲ ਜਿਹੜੇ ਮਨਮੁਖ ਨੇ ਉਹ ਬੋਹ ਦੇ ਹਨੇਰੇ ਚ ਵਿਚਾਰੇ ਘੁੰਮ ਹੋਇਆ ਹੈ ਗਵਾਲ ਉਹ ਉਹ ਨੇ ਅੰਦਰ ਪੈਦਾ ਕੀਤਾ ਹੋਇਆ ਦੂਜੇ ਭਾਅ ਮਾਇਆ ਦੀ ਗੱਲ ਕਰਦ ਰਹੀ ਜਦਵੀ ਕਰਦ ਰਹੀ ਜਿੰਨੀਆਂ ਸਕੀਮਾਂ ਨੇ ਸਭ ਸੰਸਾਰੀ ਮਾਇਆ ਕੱਠੀ ਕਰਦੀਆਂ ਮਾਇਆ ਪੈਦਾ ਕਰਦੀਆਂ ਆ ਗੁਜਰਾਣ ਕਰਦੀਆਂ ਸਿਰਫ ਦੁਨੀਆਵੀ ਤੇ ਗੱਲਾਂ ਨੇ ਦੁਨੀਆ ਦਾ ਜੀਵਨ ਸੁਖੀ ਕਿਵੇਂ ਹੋਵੇ ਦੁਨੀਆ 'ਚ ਅਸੀਂ ਤਰੱਕੀ ਕਿਵੇਂ ਕਰ ਸਕਦੇ ਆ ਉਹ ਬੋਲ ਆ ਉਹਨਾਂ ਦਾ ਉਪਦੇਸ਼ ਨੇ ਦੂਜੇ ਪਾਸੇ ਸਦਾ ਦੁੱਖ ਮਾਇਆ ਸਦਾ ਦੁੱਖੇ ਦੁੱਖ ਰਿਕਲਦਾ ਕਿ ਸੋ ਕਦੇ ਕਿਸੇ ਨੂੰ ਨਹੀਂ ਮਿਲਿਆ ਜਿੰਨਾ ਜ਼ਿਆਦਾ ਆਇਆ ਬਣਾ ਹੋਊਗਾ ਉਹਨੀ ਜ਼ਿਆਦਾ ਜੰਦਾ ਹੋਊਗੀ ਦੁੱਖਾ ਨਿਤ ਨੀਰ ਵੀ ਰੋਜ਼ ਪਾਣੀ ਦੇ ਲਟਕਣਾਂ ਵਾਲੀ ਗੱਲ ਆ ਲੱਭਦਾ ਵਿੱਚੋਂ ਕੁਛ ਨਹੀਂ ਜਿਹੜੇ ਦੁਨੀਆਂ ਕਥਾ ਕਹਾਣੀਆਂ ਵੀ ਸੁਣਾਉਂਦੇ ਨੇ ਗੁਰਮਤਿ ਛੱਡ ਕੇ ਉਹ ਵੀ ਢੀਰ ਬਰੋਲਣਾਂ ਵਾਲੀਓ ਗੱਲ ਆ। ਉਹ ਦੂਜੇ ਪਾਇਆ ਤੁਹਾਨੂੰ ਵੀ ਮਾਰਾ ਦੀ ਸੀਟ ਤੇ ਬੈਠੂ ਐਨੇ 100 ਰੁਪਏ। ਇਹ ਸਭ ਵਪਾਰ ਆ ਉਹਨਾਂ ਦਾ। ਉਹ ਉੱਤੇ ਪਾਣੀ ਉੱਥੇ ਢੀਰ ਬਰੋਲਣਾਂ ਵਾਲੀ ਗੱਲ ਹਾਂਜੀ। ਗੁਰਮੁਖੀ ਨਾਮ ਧਿਆਈ ਹੈ ਮੱਥੀ ਤਤ ਕਢੋਲੇ ਅੰਤਰ ਪ੍ਰਗਾਸ ਘਟ ਚਾਨਣਾ ਹਰ ਲੱਦਾ ਟੋਲੇ ਗੁਰਮਖਾਨਾ ਕੀ ਕੀਤਾ ਨਾਮ ਕੀ ਹੈ ਇਹ ਟੋਲਣਾ ਇਹ ਲੱਭਣਾ ਇਹ ਵਤਣਾ ਇਹਦਾ ਕੋਈ ਕੀਤਾ ਨਹੀਂ ਖੋਜ ਕੀਤੀ ਹੈ ਕੱਢ ਲਿਆ ਨਾਮ ਕੱਢ ਲੈਣਾ ਹੈ ਕੁਰਬਾਨੀ ਤੋਂ ਕੁਰਬਾਨੀ ਨਾਮ ਸੁਆਇਆ ਹੈ ਗੁਰਮੁਖੀ ਨਾਮ ਤੇ ਹੈ ਇਹ ਗੁਰਬਾਣੀ ਪੜ੍ਹਦੇ ਸੇ ਨਾਮ ਕੀ ਹੈ ਇਹ ਧਿਆਨ ਲਾ ਕੇ ਪੜੀਏ ਗੁਰਬਾਣੀ ਸਮਝੀ ਹੈ ਵਿਚਾਰੀ ਹੈ ਮੱਤ ਤਤ ਕਢੋਲਾ ਬਾਸਮੁਸਤ ਕਰਕੇ ਗੁਰਬਾਣੀ ਦਾ ਤਤ ਕਢ ਲਿਆ ਚਾਨਣ ਵੀ ਹੋ ਗਿਆ ਉਹਨਾਂ ਦੇ ਹੋ ਜਾਂਦਾ ਟਕਿਆ ਉਹਨਾਂ ਹਿਰਦੇ ਅੰਦਰ ਹਿਰਦੇ ਚਾਨਣ ਹੋ ਜਾਂਦਾ ਹਰ ਲੱਗਾ ਟੋਲੇ ਅੰਦਰ ਉਹ ਜਿਹੜਾ ਸੀ ਲੱਭ ਲੈਂਦੇ ਨੇ ਉਹਨਾਂ ਨੂੰ ਹਸਬਤ ਜਾਂਦਾ ਅੰਦਰ ਚਾਨਣ ਹੋ ਗਿਆ ਤਾਂ ਹਰ ਤਾਂ ਅੰਦਰ ਹੀ ਹੈ ਨਾ ਠੀਕ ਹੈ ਜੀ ਹਰ ਜੱਪ ਹਰਦੇ ਮੈਂ ਹਰਦੇ ਚ ਹਰ ਘਟ ਘਟ ਮੈਂ ਹਰ ਜੂ ਬਸਾ ਜਾ ਘਟ ਦੀ ਚੈਨਲ ਹੋ ਗਿਆ ਹਰ ਦਾ ਦਰਸ਼ਨ ਹੋ ਗਿਆ ਲੱਭਿਆ ਜੀ ਹਰ ਨੂੰ ਸੀ ਉਹ ਲੱਭੇ ਆਇਆ ਹੈ ਜੀ ਲੱਭਿਆ ਆਪੇ ਪਰਮਪੁੱਲਾਇੰਦਾ ਜਿਹੜੇ ਆਪੇ ਭੁਲਾਏ ਨੇ ਉਹਨਾਂ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ ਉਹ ਵੀ ਦੇਖੋ ਸੁਣਦੇ ਸਾਰੀ ਗੱਲ ਨੇ ਸਾਡੀ ਪਰ ਉਹ ਆ ਪਤਾ ਪਰ ਇਹ ਪਤਾ ਨਹੀਂ ਕਿ ਯੂਨੀਟੀ ਕਾ ਲਾਇਆ ਉਹਨਾਂ ਦੇ ਇਹਦੇ ਬਾਰੇ ਅਸੀਂ ਨਹੀਂ ਕੁਝ ਕਹਿ ਸਕਦੇ ਕਿਉਂ ਦੀ ਮੰਦ ਕਿਉਂ ਨਹੀਂ ਮੰਨਣ ਦਿੰਦਾ ਸਾਡੀ ਵੀ ਸਮਝ ਕਹਿੰਦੇ ਬਾਹਰੇ ਆ ਠੀਕ ਹੈ ਕਾਫੀ ਆ ਵੀ ਫੇਰ ਵਾਹ ਸੱਚੇ ਪਾਤਸ਼ਾਹ ਨੂੰ ਸੱਚੀ ਨਾ ਹੀ ਨਾ ਮਿਲਦਾ ਠੀਕ ਹੈ ਇੱਥੇ 17ਵੀਂ ਪੌੜੀ ਸਮਾਪਤੀ ਜੀ